गुण विचारे ज्ञानी सोए गुण में ज्ञान प्राप्त होई गुण विचारे जे परमेश्वर रे ओ ज्ञान पर माशाल्लाह हासिल कर लेता है और वो जान लेता है <laughs> तो गुणानु विचार में ही परमेश्वर का ज्ञान प्राप्त ਠੀਕ ਹੈ। ਗੁਰੂ ਦਿੱਤਾ ਨਾ ਗੁਣੋਂ ਦੇ ਵਿੱਚ ਹੁੰਦੇ। ਗੁਣ ਮਹਿ ਗਿਆਨ ਪ੍ਰਾਪਤ ਹੋਏ। ਹਾਂ, ਸੁ ਗਿਆਨ ਪ੍ਰਾਪਤ। ਠੀਕ ਹੈ ਜੀ। ਗੁਣ ਵਿਰਲਾ ਸੰਸਾਰ ਸਾਚੀ ਕਰਨੀ ਗੁਰ ਵਿਚਾਰ। ਗੁਰ ਹੁੰਦਾ। ਹੂੰ। ਗੁਰੂ ਦਿੱਤੇ ਵਿਰਲਾ ਹੁੰਦਾ। ਬਾਕੀ ਜਬ ਕਾਚੀ ਕਾੜ ਲੀਏ ਅੱਛਾ ਜੀ ਉਹ ਉਹ ਤੇਲ ਦੀ ਸੱਚੀ ਕਾੜ ਲੀਏ ਬਾਕੀ ਕਾਚੀ ਕਾੜੀ ਹੂੰ ਠੀਕ ਹੈ ਜੀ ਅਗਮ ਕੀਮਤ ਨਹੀਂ ਪਾਏ ਤਾਂ ਮਿਲੀਏ ਜਾਂ ਲਏ ਮਿਲਾਏ ਅਗਾਂਗੋਚਰ ਬੁੱਧੀ ਤੋਂ ਪਰੇ ਹੈ ਆਰ ਵਿਦਿਆਤਰ ਤੋਂ ਪਰੇ ਹੈ ਉਹ ਤੇ ਕੀ ਬੁੱਧੀ ਤੋਂ ਕਾਬਲੀਏ ਜਾਲੇ ਬੁਲਾਏ ਉਹ ਤਦ ਹੀ ਮਿਲਿਆ ਜਾ ਸਕਦਾ ਆ ਬੁਲਾਦੇ ਠੀਕ ਹੈ ਜੀ ਗੁਣਵੰਤੀ ਗੁਣ ਸਾਰੇ ਨੀਤ ਨਾਨਕ ਗੁਰਮਤ ਮਿਲਿਆ ਮੀਤ ਗੁਣਵੰਤੀ ਗੁਣ ਸਾਰੇ ਦੀਤ ਗੁਣਵਤੀ ਵਿੱਚ ਸਾਰੇ ਗੁਣ ਹਰ ਵਕਤ ਹਾਂ ਗੁਣ ਸਵਦੀਤ ਜੀ ਬੋਲੋ ਵੀ ਤਗੁਰ ਪੈਰੇ ਹੁਣ ਨੀ ਗਏ ਹਾਂ ਮਾਨਕ ਗੁਰਮਤ ਮਿਲਿਏ ਮੀਤ ਗੁਰਮਤ ਦਾ ਆਸਰਾ ਲੈ ਕੇ ਹੀ ਮਿਲਿਆ ਜਾ ਸਕਦਾ ਹੈ ਜੀ ਗੁਰਮਤ ਇੱਕ ਸਾਧਨ ਸਾਡੇ ਕੋਲ ਬਿਨਾਂ ਅੱਛਾ ਜੀ ਹਾਂਜੀ ਕਾਮ ਕਰੋਦ ਕਾਇਆ ਕੋ ਗਲ ਪਤਨਾ ਵੀ ਗੋੜੇ ਬਿਲੜੇ ਗੋੜ ਮੁਥੇ ਵਿੱਚੋਂ ਕੋਣ ਬਿਲੜ ਜਨ ਦੇ ਜਿਹੜੀ ਕਮੀ ਹੋ ਪੂਰੀ ਹੋ ਜੜੀ ਹੈ ਠੀਕ ਹੈ ਜੀ ਹਾਂਜੀ